शलोक महल्ला तीसरा पै विच सब आकार है निरपोह हर जीव होए पौ विच सब आकार है जिन्ना आकार है सब पौ दे विच ही हर जीव सोए हर जीओ अपने आप नु लत्ता ਜਦੋਂ ਮਾਇਆ ਦਾ ਵਕਰਾ ਸਰੂਪ ਆਪਣਾ ਜਾਣ ਲੈਂਦਾ ਹੈ ਫਿਰ ਫੋਜ ਜਾਂਦਾ ਹਰ ਆਉ ਗਿਓ ਜਦ ਇਕੱਠੇ ਹੋ ਜਾਂਦੇ ਨੇ ਪੰਜਾਬ ਨੂੰ ਸਮਝ ਕੇ ਫਿਰ ਕਦੇ ਨਾ ਹੋਏ ਸਤਗੁਰ ਦੀ ਸੇਵਾ ਕਰਕੇ ਹਰ ਮਨ ਵਸਦਾ ਗਿਆਨ ਬੋਲ ਵਸਦਾ ਜੋਤ ਬੋਲ ਵਸਦੀ ਹੈ ਫਿਰ ਕੋਈ ਜਾਂਦਾ ਫਿਰ ਉਹ ਨਿਰਪੋ ਹੋ ਜਾਂਦਾ ਕਹਿੰਦਾ ਮਤਲਬ ਭੌ ਕਦੇ ਨਾ ਹੋਏ ਤੂੰ ਇਹੀ ਦੱਸਣਾ ਚਾਹੁੰਦੇ ਆ ਫਿਰ ਉਹ ਨਿਰਪੋ ਬਣ ਜਾਂਦਾ ਹੈ ਉਹ ਗਿਆਨ ਦੁਸ਼ਮਨ ਦੁੱਖ ਤਿੰਨ ਕੈ ਨੇੜ ਨਾ ਆਵੇ ਪਹੁੰਚ ਸਕੈ ਕੋਈ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੇਂ ਸੋ ਹੋਏ ਦੁੱਖਰ ਦੁਸ਼ਮਨ ਹੋਏ ਨਹੀਂ ਨੇੜੇ ਆਉਂਦੇ ਉਹਦੇ ਨੇੜੇ ਨਹੀਂ ਆ ਸਕਦੇ ਉਹਦੇ ਦੁਸ਼ਮਨ ਦੁੱਖ ਨੇੜੇ ਨਹੀਂ ਆਉਂਦੇ ਤੇਚ ਅੱ삐 ਅੱਪੇ ਕਰਦੀ ਆਪੇ ਗੱਲ ਤੇ ਕਰਦੇ ਪਹੁੰਚ ਸਕੈ ਕੋਈ ਜੋ ਉਹਦੇ ਤੱਕਪੜ ਨਹੀਂ ਸਕਦਾ ਤੇ ਹੱਥ ਨਹੀਂ ਆਉਂਦੇ ਸਕਦੇ ਤੋ ਰੱਖਿਆ ਉੱਤੇ ਰਾਤ ਨਹੀਂ ਆਉਂਦੀ ਠੀਕ ਉਹਨਾਂ ਦੀ ਕੋਈ ਉੱਤੇ ਜਲਦੀ ਨਹੀਂ ਹੁੰਦੀ ਵਿਚਾਰਿਆ ਜੋਤਿਸ ਭਾਵੇ ਸੋ ਵਿਚਾਰਿਆ ਜੋਤਿਸ ਭਾਵੇ ਜੋ ਪਰਮੇਸ਼ਰ ਪੁੱਜਦਾ ਹੁੰਦਾ ਹੋਈ ਹੈ ਨਾਨਕ ਆਪੇ ਹੀ ਪੱਤ ਰੱਖ ਸੀ ਕਾਰਜ ਸਵਾਰੈ ਸੋਈ ਕਹਿੰਦਾ ਆਪੇ ਹੀ ਪੱਤ ਰੱਖੀ ਆਦਮੀ ਜੇ ਬਸ ਜਾਨੇ ਬਚਾਣੀ ਪਤਾ ਬਚਾ ਲੈ ਠੀਕ ਹੈ ਜਿਹੜੇ ਆਦਮੀ ਆਪਣੀ ਪਤ ਬਚਾਉਂਦੇ ਦੱਸਦੇ ਉਹ ਭੋੜ ਨੇ ਕਾਰਜ ਸਵਾਰੇ ਸੋਏ ਉਹਦੀ ਫੁਨ ਜਾਹੇ ਚੱਲੇ ਨੇ ਚੱਲ ਗਏ ਰੇਵੇ ਵੀ ਫਿਰ ਚੱਲ ਜਾਣ ਜਿਹੜੇ ਰੇਵੇ ਵੀ ਉਹਨੇ ਵੀ ਚੱਲ ਜਾਂਦੇ ਠੀਕ ਹੈ ਜਿਹਦੇ ਸਤਗੁਰੂ ਨੇ ਸੇਵਿਆ ਜਿਹਨੂੰ ਸਤਗੁਰੂ ਨੇ ਸੇਵਾ ਨਹੀਂ ਕੀਤੀ ਅਰ ਜੀ ਤੇ ਪਛਤਾਏ ਆਉ ਨਾਨਕ ਸੱਚ ਰਤੇ ਨਾ ਵਿਛੜੈ ਸਤਗੁਰ ਸੇਵ ਸਮਾਹੀ ਉਹਨਾਂ ਕਹਿੰਦਾ ਗਿਆ ਉਹ ਵਿਛੜਦੇ ਰਿਹਾ ਸਤਗੁਰੂ ਦੀ ਸੇਵਾ ਕਮ ਉਹਨਾਂ ਦੀ ਸੇਵਾ ਹੀ ਕਰਦੇ ਨੇ ਫਿਰ ਉਹ ਫੇਰ ਹੀ ਆ ਸਤਗੁਰੂ ਦੀ ਸੇਵਾ ਕਮ ਉਹਦੇ ਕੋਲ ਵੀ ਸੇਵਾ ਜੇ ਸੁਭਾਜਦੇ ਸੇਵਾ ਹੀ ਕਰਦੇ ਰਹਿੰਦੇ ਨੇ ਇਹਦੇ ਵਿੱਚ ਚੰਗਾ ਲੱਗਦਾ ਠੀਕ ਹੈ ਜੀ ਪੌੜੀ ਤਿਸ ਮਿਲੀਏ ਸਤਗੁਰ ਸੱਜਣਾ ਜਿਸ ਅੰਦਰ ਹਰ ਗੁਣਕਾਰੀ ਤਿਸ ਮਿਲੀਏ ਸਤਗੁਰ ਪ੍ਰੀਤਮੈ ਜਿਨ ਹੌਮੇ ਵਿੱਚੋਂ ਮਾਰੀ ਸਤਰ ਹਰ ਗੁਣ ਕਾਦੀ ਜਿਹੜੇ ਅਸਲ ਹਰੀ ਆਲੇ ਗੁਣ ਦੇ ਹਾਂਜੀ ਕਾਰੀ ਗੁਣ ਦੇ ਕੁਛ ਕਰਨ ਵਾਲੇ ਗੁਣ ਦੇ ਗੁਣ ਕੁਛ ਕਰਨ ਦੀ ਸਭਰਥਾ ਰੱਖਦੇ ਨੇ ਗੁਣ ਬਦਲ ਲੈਣ ਦੀ ਸਭਰਥਾ ਰੱਖਦੇ ਦੇ ਅੰਦਰ ਹਰ ਹਰ ਵਾਲੇ ਗੁਣ ਹੈ ਹਰ ਗੁਣ ਕਾਰੀ ਨੇ ਹੋ ਕੁਛ ਕਲ ਧੋਲਵਾ ਦੇ ਠੀਕ ਹੈ ਜੀ ਇਸ ਮਿਲਿਆ ਸਤਗੁਰ ਪ੍ਰੀਤਮ ਜਿਨ ਹੌਮੇ ਵਿੱਚੋਂ ਮਾਰੀ ਖੇਲੇ ਵਿੱਚ ਉਹ ਵੀ ਮਾਣਿਤ ਸਤਗੁਰ ਸਤਗੁਰ ਪ੍ਰੀਤਮ ਨੂੰ ਕੋਲਣਾ ਜਾਈਦਾ। ਜਿਹਦੇ ਵਿੱਚ ਆਪਣੇ ਵਿੱਚ ਹੋਊਗਾ ਗੁਲ ਨਹੀਂ। ਠੀਕ ਹੈ ਜੀ। ਪੂਰਾ ਧਨ ਧਨ ਹੈ ਜਿਨੇ ਹਰ ਉਪਦੇਸ਼ ਦੇ ਸਬ ਸ੍ਰਿਸ਼ਟ ਸਵਾਰੀ। ਐਸਾ ਸਤਗੁਰ ਪੂਰਾ ਧਨ ਧਨ ਹੈ ਜਿਨੇ ਹਰ ਉਪਦੇਸ਼ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸਵਾਰ ਦਿੱਤਾ। ਤੇ ਮੇਰਾ ਪਾਲਿਆ ਜਿਦਾ ਅਸੇ ਗੁਰਮਤਿ ਦੇ ਰਸਤੇ ਪਾਲਿਆ ਸਵਾਰਤਾ ਉਸ ਅਕਬਰ ਧੰਤਾ ਦੇ। ਪੂਰਾ ਕਿਉਂ ਲਿਖਿਆ ਜੀ ਸਤਗੁਰ ਪੂਰਾ ਅਧੂਰਾ ਵੀ ਹੁੰਦਾ ਹੈ ਸਤਗੁਰ ਆਹ ਅਧੂਰਾ ਵੀ ਉੱਤੇ ਖੰਡਰਤਾ ਨਹੀਂ ਦੂਰ ਕਾਬੂ ਜਿਹੜੀ ਹੈ ਦੂਰ ਹੈ ਅੱਛਾ ਤੇ ਸਤਗੁਰ ਤਾਂ ਹਰੇਕ ਦੇ ਅੰਦਰ ਹੈ ਪਰ ਸਤਗੁਰ ਪੂਰਾ ਜਦੋਂ ਹੁੰਦਾ ਫਿਰ ਉਹਨੂੰ ਹਰ ਦਾ ਉਪਦੇਸ਼ ਪ੍ਰਾਪਤ ਹੁੰਦਾ ਇਹੀ ਕਹਿਣਾ ਚਾਹੁੰਦੇ ਹਾਂ हां ओ वाणी के अंदर अपना जितेया सा तो पूरा खद है। दा खाली होया ना पहले हो दा दा है। अच्छा जी। गाने पूरा होण है। ठीक है जी। पूरा दा बस जिते जगजीत ਤੇ ਇਸ ਸ੍ਰਿਸ਼ਟੀ ਤੋਂ ਕੀ ਭਾਵੇਂ ਸਭ ਸ੍ਰਿਸ਼ਟੀ ਸਵਾਰੀ ਸ੍ਰਿਸ਼ਟੀ ਤੋਂ ਕੀ ਭਾਵੇਂ ਕਿ ਜਿਹੜੇ ਜੀਵ ਹੈ ਕਿਹਦਾ ਉਤਰਵੇਂ ਆ ਗਿਆ ਜੋਗੀ ਆ ਗਿਆ ਕੋਈ ਆ ਗਿਆ ਉਹ ਸ੍ਰਿਸ਼ਟੀ ਹੋਈ ਹੈ ਸਵਾਰੀ ਤੇ ਜਿਹਦੇ ਆਗਮਨੀ ਦੀ ਗੱਲ ਹੈ ਜਨਮ ਦੀ ਗੱਲ ਠੀਕ ਹੈ ਜੀ ਕਿੰਕੋ ਸੰਤੋ ਰਾਮ ਨਾਮ ਪੌਜਲ ਬਿਕਤਾਰੀ ਗੁਰ ਪੂਰੇ ਹਰ ਉਪਦੇਸ਼ਿਆ ਗੁਰ ਵਿਟੜਿਓ ਹਉ ਸਦਬਾਰੀ ਇਹ ਗੁਰ ਅਰਕੇ ਸੁਣ ਤੋ ਜਿਤ ਰਾਮ ਨਾਮ ਜਪਿਓ ਪੌਜਲ ਵਿਖਤਾਰੀ ਇਹ ਜਿਹੜੀ ਪਵਿੱਤਰ ਅੰਦਰ ਹੈ ਦੀ ਗੱਲ ਕਰਦਿਆਂ ਮਾਇਆ ਦੀਆਂ ਗੱਲਾਂ ਕਰਾਂ ਨਾ ਮਾਇਆ ਸੁਭਜਾ ਦੀ ਤੇ ਮਾਇਆ ਦੀ ਗੱਲ ਨਾ ਕਰਿਓ ਕੋਈ ਆਇਆ ਕੁਝ ਦੀ ਆਇਆ ਪਿਛੇ ਪਿਛੇ ਤੋਰੀ ਬਰੂਨਾ ਹੈ ਇਹਦੇ ਮੈਂ ਸਰਜੂਗਾ ਆਪਨਾ ਬੇਰ ਦੀ ਕਰ ਸਤਾਂ ਨੂੰ ਕਿ ਕਹੀ ਹੈ ਜੀ ਸੰਤ ਤਰੇ ਨਹੀਂ ਹੁੰਦੇ ਸਾਡੇ ਸਮੇਂ ਆਇਆ ਸੰਤ ਜੀ ਨੂੰ ਆਪਣਾ ਉਪਦੇਸ਼ ਗਲਤ ਦੇਣ ਲੱਗੇ ਠੀਕ ਗੁਰਬਾਣੀ ਤੋਂ ਉਪਦੇਸ਼ ਲੈ ਕੇ ਸੰਤਾਂ ਉਪਦੇਸ਼ ਦਿੰਦੇ ਫਿਰ ਤਾਂ ਗੱਲ ਬੰਦ ਦੀ ਗੁਰ ਪੂਰ ਹਰ ਉਪਦੇਸ਼ਿਆ ਗੁਰ ਵਿਟੜਿਓ ਹਉ ਸਦਬਾਰੀ ਗੁਰਪੁਰੇ हर உபਦੇਸ਼ਿਆ ਗੁਰਪੁਰੇ ਦਾ ਹਰ உபਦੇਸ਼ ਦਿੱਤਾ ਜੋ ਦਾ உபਦੇਸ਼ ਦਿੱਤਾ ਹਰ ਕੀ ਹੈ ਜੀ ਜਿਹੜੇ ਕੋਲ ਹੈ ਇਹ ਹਰ உபਦੇਸ਼ਿਆ ਹਾਂਜੀ ਕਰਕੇ ਗੁਰਪੁਰੇ